दखणे महला पंचवा सच सुहावा काडिए कूड़े कूड़ी सोए नानक जानी है जिन सच पल्ले होए सच सुहावा काडिए जीनो सच परगट काल लेया ना बाहर सुहावा सुखदाई कैसा थे सबनु सुख देर वाला था जदों प्रकट कर लिया किसे ने कर लिया बलनाथ ने कर लिया या कबीर ने कर लिया ਆ ਕੂੜੇ ਵਾਲੀ ਕੂੜੀ ਜਿਹੜੀ ਸੋਭਾ ਇਹ ਵੀ ਕੂੜੀ ਰੰਗ ਲੱਗ ਜਾਂਦੀ ਹੈ ਸੰਸਾਰ ਨੂੰ ਜਿਹੜੇ ਝੂਠੇ ਤੇ ਉਹਨਾਂ ਦੀ ਸੋਭਾ ਵੀ ਝੂਠੀ ਇਹ ਜਿਹੜੀ ਸੋਭਾ ਕਰਦੇ ਤੇ ਬੁਰਗਿਆਦੀ ਮਹਾਰਕਸਾਬ ਲੱਗਣ ਲੱਗ ਜਾਂਦਾ ਵੀ ਇਹ ਸੀ ਇਹ ਕੂੜੀ ਸੋਏ ਉਹਨਾਂ ਦੀ ਸਭ ਸੋਭਾ ਕੂੜੀ ਲੱਗਣ ਪ੍ਰਗਟ ਹੋ ਜਾਂਦੀ ਹੈ ਇਹ ਪ੍ਰਗਟ ਹੋ ਜਾਂਦਾ ਸੋਭਾ ਸੀ ਸਾਰੀ ਸੁਸਾਰੀ ਝੂਠੀ ਸੀ ਬਣਾਈ ਹੋਈ ਐਵੇਂ ਭਲ ਬਣਾਈ ਹੋਈ ਸੀ ਸੱਚ ਨਹੀਂ ਸੀ ਕਿਸੇ ਕੋਲ ਵੀ ਨਾਨਕ ਬੰਦੇ ਜਾਣੀ ਹੈ ਕਹਿੰਦੇ ਕਹਿੰਦਾ ਐਸੇ ਤਾਂ ਬੰਦੇ ਹੁੰਦੇ ਨੇ ਜਿਹਨਾਂ ਦੇ ਪੰਲੇ ਸੱਚ ਹੁੰਦੇ ਉਹ ਤਾਂ ਕਦੇ ਕਦੇ ਕੋਈ ਫਾਇਦਾ ਹੁੰਦਾ ਬਿਲ ਨਹੀਂ ਹੁੰਦੇ ਜਿਹੜੇ ਪੱਲ ਬਣਾਈ ਵਰਦੇ ਹੋ ਜਾਂਦੇ ਨੇ ਪ੍ਰਗਟ ਹੋ ਜਾਂਦਾ ਕੂੜਿਆ ਦੀ ਕੂੜੀ ਜਿਹੜੀ ਸੋਧਾ ਉਹ ਸਾਰੀ ਕਬੀਰ ਕਹਿੰਦਾ ਕਹਿੰਦਾ ਸਭ ਜਾਣੋਗੇ ਜਦ ਉਗੜੋਗੇ ਪਾਜ ਪਾ ਦਾ ਪਾਜ ਉਗੜ ਜਾਂਦਾ ਹਾਂਜੀ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈ ਨਿਹਾਲ ਸਾ ਸੁੱਤੜੀ ਸੋਛੜ ਡਿਠ ਤੈ ਸੁਪਨੇ ਹੋਂ ਖੰਨੀਐ ਸੱਜਣ ਮੁਖ ਰੂਪ ਸੱਜਣ ਦਾ ਤਾਂ ਇਹ ਮੁਖਾ ਉਹ ਤਾਂ ਉਹਦੀ ਤਾਂ ਉਪਮਾ ਹੋਵੇ ਤਾਂ ਅਨੂਪ ਹੈ ਉਪਮਾ ਨਹੀਂ ਦਿੱਤੀ ਜਾ ਸਕਦੀ ਜਿਹਦੇ ਵਰਗਾ ਹੋਰ ਕੋਈ ਨਹੀਂ ਉਹਦਾ ਅਨੂਪ ਕਹਿੰਦੇ ਫਰਮਾਇਤਾ ਅੱਠੇ ਪੈਰ ਮੈਨੂੰ ਤਾਂ ਨਹੀਂ ਤਾਂ ਉਹ ਮੇਰੇ ਵਿਚਾਲੇ ਤਾਂ ਸੁਪਟ ਨਹੀਂ ਆ ਰਿਹਾ ਅੱਠੇ ਪੈਰ ਦੇ ਹਾਲ ਅੱਠੇ ਪੈਰ ਦੇ ਸੋ ਸੋ ਡਿਠ ਸੋ ਦੇਖਿਆ ਮੈਂ ਸੁਪਨੇ ਹੋਖਦੀ ਜੀਦਾ ਤਾਂ ਸੁਪਨਾ ਘਟਨ ਕਰਤਾ ਜੇ ਤੁ ਸੁਪਨੇ ਚ ਜਗਾਤਾ ਸੁਪਨੇ ਤਾਂ ਸਾਰੇ ਦੇਖਦਾ ਇਹ ਸਤਸਾਲ ਸਕਲਾ ਸੁਪਨ ਜੋ ਬੰਦ ਸੁਪਨੇ ਜੇ ਬਾਹਰ ਆ ਗਈ ਉਹ ਵੀ ਦਰਸ਼ਨ ਕੀਤਾ ਬਈ ਤਾਂ ਤਦ ਫਿਰ ਸਾ ਇੱਕ ਸੰਗੀ ਬਾਸਾ ਵਿੱਚ ਹਉ ਦੇ ਭੇਦ ਕਰਾਰੀ ਕਹਿੰਦਾ ਮਨ ਸੁਤੀ ਹੋਈ ਬੁੱਧੀ ਨੂੰ मन मजाहु लख तुदों दूर ना सों पेरी सगल दा सच है परखया जीना दे उकी परखया एलान थोथला दसदे ने ता थोथा विच है नहीं जो दस रहे ने ओदे विच सच है नहीं परखू पड़दे फंदे उंदे काल नो परखू कली काल बणाने बड़े फिरदे ने परखू जो गल कहंदे ने सच लबदा ही नहीं किते ਥੋਥੜੂ ਥੋਥੜਾ ਠੀਕ ਹੈ ਜੀ ਇਹ ਕੀ ਭਾਵ ਕੀ ਬਣੀਆ ਸੱਜਣ ਸੱਚ ਪਰਖ ਮੁਖ ਮੁਖੋ ਬੋਲ ਵੀ ਦਿੱਤਾ ਪਰਖ ਕੇ ਪਰ ਥੋਥੜਾ ਜੋ ਬੋਲੇ ਉਹ ਥੋਥੜਾ ਇਹਦਾ ਮਤਲਬ ਪਰਖਿਆ ਦੇਖਿਆ ਕੁਛ ਉਹ ਬਾਹਰ ਦੇਖਿਆ ਸੱਜਣ ਕਹਿੰਦੇ ਨੇ ਆਪਣੇ ਪਹਿਲੇ ਸੰਤਰੂ ਸੱਜਣ ਬਣਾਈ ਬੈਠੇ ਨੇ ਜਿਹੜਾ ਮਹਾਪੁਰਸ਼ਰੀ ਉਹਦੇ ਨਾਲ ਜੁੜੇ ਹੋਏ ਨੇ ਬਾਰਮੁਖੀ ਜੁੜੇ ਹੋਏ ਨੇ ਉਹਨੂੰ ਸੱਜਣ ਬੰਦੀ ਬੈਠੇ ਨੇ ਉਹ ਰੂਹ ਸਭ ਕੁਝ ਬੰਦੀ ਬੈਠੇ ਨੇ ਅੰਦਰ ਜਿਹੜਾ ਹੈਗਾ ਅਗਲੀ ਪੰਤੀ ਦੱਸ ਦੂਗੀ ਗੱਲ ਕੀ ਹੈ ਅੰਦਰ ਜਿਹੜਾ ਸੱਜਣਾ ਉਹ ਨਹੀਂ ਦੇਖਿਆ ਅੱਛਾ ਮੁਖ ਅਲਾਵਣ ਮਨ ਮਜਾਹੂ ਲਖ ਤੁਦੋਂ ਦੂਰ ਨਾ ਸੋ ਕਹਿੰਦੇ ਅੰਦਰੋਂ ਦੇਖਾ ਬਾਹਰ ਬਾਹਰੋਂ ਦੇਖ ਕੇ ਦੱਸੂਗੀ ਗੱਲ ਉਹ ਜੀ ਵਾਹਿਗੁਰੂ ਖਾਨੇ ਬਸ ਕਿਰਪਾ ਕਰਦੀ ਹੱਤਪਹਿਰ ਤਾਂ ਬਿਲਕੁਲ ਮੇਰੇ ਤੱਤੇ ਦੇ ਲੋਕ ਦਾ ਦਰਸ਼ਨ ਕਰਾਤਾ ਜਿਹੜੀਆਂ ਤਾਲੀਆਂ ਨੇ ਛੱਡਦੇ ਹੋ ਮਨ ਬਜਾਹੂ ਲੱਖ ਅੰਦਰੋਂ ਦੇਖ ਬਸ ਦੇ ਵਿੱਚ ਤੇਰੇ ਕੀ ਹੈ ਉਹ ਹੈ ਉਹਦੀ ਗੱਲ ਦੱਸ ਉਹਦੇ ਬਾਰੇ ਦੱਸ ਕੁਝ ਤੂੰ ਦੂਰ ਨਾ ਤੋਂ ਪੇਰੀ ਤੇ ਤੋਂ ਦੂਰੇ ਨਹੀਂ ਆਉਦਾ ਕਿੱਥੇ ਦੀਆਂ ਗੱਲਾਂ ਕਰਦਾ ਤੂੰ ਕਿਹਦੀਆਂ ਸिखਾਈ ਹੋਈਆਂ ਗੱਲਾਂ ਕਰਦਾ ਤੂੰ ਛੋਠੀਆਂ ਗੱਲਾਂ ਨੇ ਸਾਰੀਆਂ ਔੜੀ ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਧਰਤੀ ਹੈ ਆਕਾਸ਼ ਹੈ ਪਤਾਲ ਹੈ ਸੂਰਜ ਹੈ ਚੰਦ ਹੈ ਇਹ ਤਾਂ ਕਹਿੰਦੇ ਸਭ ਨਾਸਵੰਤ ਨੇ ਹੋਜੀ ਬਾਦਸ਼ਾਹ ਸ਼ਾ ਉਮਰਾਵ ਖਾਨ ਤਾਹੇ ਡੇਰੇ ਜਾਸੀ ਪਾਸ਼ਾ ਕਹ ਲੋ ਸ਼ਾ ਕਹ ਲੋ ਉਮਰਾਵ ਕਹ ਲੋ ਬੜੇ ਬੜੇ ਆਦਮੀ ਨੇ ਜੜੇ ਖਾਨਦ ਕਹ ਲੋ ਫਾਇਰ ਡੇਰੇ ਦਾ ਜਸਤੀ ਹਲੇਰੇ ਢਾਕੇ ਸਭ ਜਿਹੜੀ ਥਰੀਲ ਦਾ ਡੇਰਾ ਨਾ ਸਭ ਟਾਈਟੇਰੀ ਹੋ ਜਾਣ ਸਭ ਨੂੰ ਲੈਣ ਵਾਲੇ ਗ੍ਰਿਫਤਾਰ ਕਰਕੇ ਸਾਰਿਆਂ ਨੂੰ ਚਲੇ ਜਾਣ। ਜਿਹੜਾ ਆਪਣਾ ਬੋਲ ਬੋਲ ਤੈ ਜਾਣੇ ਲੋ ਨਾ ਠੀਕ ਹੈ ਤਾਂ ਕਿ ਨਾ ਜੀ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਤੂੰ ਜਾਣ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸ਼ੇਖ ਮਸਾਇਕਾਂ ਸਭੇ ਉੱਠ ਜਾਸੀ ਇਹ ਜਿਹੜੇ ਗਰੀਬ ਵਸਤ ਜਿਹਦੇ ਵੀ ਗਰੀਬ ਨੇ ਵਸਤ ਗਰੀਬ ਸਭ ਚੜੇ ਹੋਏ ਦੇ ਲੋ ਚੜੇ ਨੇ ਕੋਈ ਤਾਂ ਛਿਬ ਦਾ ਰੰਧ ਚੜੇ ਜਿਹੜੇ ਪਹਾੜਾਂ ਚ ਰਹਿੰਦੇ ਕੋਈ ਗਰੀਬੀ ਦਾ ਰੰਧ ਚੜੇ ਕਿਸੇ ਨੂੰ ਕੋਈ ਵਸਤ ਨੇ ਉਸ ਨੂੰ ਬੋਲਣਾ ਸਭ ਲੋਕ ਸਦਾ ਸਾਰੇ ਇੱਥੇ ਰਹਿਣ ਕਿਸੇ ਲਈ ਕਿ ਜਿੱਦਿਓ ਬੱਤਾਂ ਦੇ ਛੋਟੀਆਂ-ਬੋਟੀਆਂ ਚਲਦੀਆਂ ਸੰਸਾਰ 'ਚ ਫਕੀਰ ਵੀ ਜਿੱਡੇ ਦੇ ਗਰੀਬ ਆਪਣੇ ਆਪ ਨੂੰ ਕਹੁੰਦੇ ਨੇ ਉਹ ਵੀ ਕਾਦੀ ਨਹੀਂ ਹੰਕਾਰੀਆਂ ਨਹੀਂ ਲਾਈਨ 'ਤੇ ਪਰ ਫੇਰ ਵੀ ਗਿਆਨ ਪੂਰਾ ਨਹੀਂ ਹੈ ਗਿਆਨ ਪੂਰਾ ਨਹੀਂ ਪੂਰਾ ਗਿਆਨ ਕਰਨ ਵਾਸਤੇ ਅਗਲਾ ਜਨਮ ਲੈਣਾ ਪਊ ਕਾਜੀ ਦੇ ਸ਼ੇਖ ਦੇ ਮਸਾਇਕਾ ਸਭੇ ਉੱਠ ਜਾਂਦੀ ਲੋਕ ਨੇ ਉਹਦੇ ਗੁਰੂ ਦੇ ਥੋਂ ਦੇ ਉਸਾਇਦਾ ਹੋ ਜਿਹੜੇ ਨੇ ਇਹ ਅਹਲ ਕਾਲ ਸਭੇ ਉੱਠ ਜਾਂਦੇ ਨੇ ਕਿਸੇ ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜ਼ਾ ਬਾਗ ਨਿਵਾਜ਼ ਕתיਬ ਬਿਨ ਬੁਝੇ ਸਭ ਜਾਸੀ ਪੀਰ ਪੈਗंबर ਔਲੀਏ ਨੇ ਤਗੱਬ ਨੇ ਔਲੀਏ ਥਿਰ ਨਾ ਰਹਾਸੀ ਕੋਈ ਚੱਲਦੀ ਰਹਿਣ ਵਾਲਾ ਸਭ ਜਮਣ ਬਣ ਚਰੇ ਸਭ ਨੇ ਛੱਡ ਜਾਂਦੇ ਜਹਾਨ ਰੋਜ਼ਾ ਵਾਦ ਨਿਵਾਜ਼ ਕਤੇਬ ਬਿਰ ਬੁੱਢੇ ਸਭ ਜਾਸਦੀ ਜਿਹੜੇ ਬੁੱਢਿਆ ਨਹੀਂ ਨਾ ਕਿਸੇ ਨੇ ਇਹਨਾਂ ਰੋਜ਼ਾ ਰੱਖਣ ਵਾਲਿਆਂ ਦੇ ਬਾੰਗ ਵੇਣ ਵਾਲਿਆਂ ਦੇ ਨਿਵਾਜ਼ ਪੜਨ ਵਾਲਿਆਂ ਦੇ ਨਿਵਾਜ਼ ਕਤੇਬ ਪੜਨ ਵਾਲਿਆਂ ਦੇ ਤੇ ਬੁੱਢਿਆ ਜੀ ਬੁੱਢੇ ਸਭ ਜਾਸਦੀ ਸਾਰੇ ਚਲੇ ਜਾਂਦੇ ਮਰ ਜਾਂਦੇ ਉਹਨਾਂ ਨੂੰ ਵੀ ਹੁਕਮ ਬੁੱਝਣਾ ਜ਼ਰੂਰੀ ਹੈ ਸਾਨੂੰ ਜੀ ਬਿਲਕੁਲ ਸੱਟ ਬੁੱਝਣਾ ਆਪਣਾ ਆਪਣਾ ਗੋੜ ਬੁੱਝਣਾ ਜ਼ਰੂਰੀ ਹੈ ਠੀਕ ਹੈ ਜੀ ਲੱਖ 84 ਮੇਦਨੀ ਸਭ ਆਵੇ ਜਾਸੀ ਨਹਿਚਲ ਸੱਚ ਏਕ ਖੁਦਾਏ ਬੰਦਾ ਅਬਨਾਸੀ ਲੱਖ 84 ਮੇਦਨੀ 84 ਲੱਖ ਜੂਨ ਆ ਪ੍ਰਥਵੀ ਧਰਤੀ ਦੇ ਉੱਤੇ ਵੇਦਨੀ ਸਭ ਆਵੇ ਜਾਸੀ ਆਉਣ ਜਾਣ ਵਾਲੀ ਹੈ ਸਭ ਜਪੜਪੜ ਚ ਲੱਗੀ ਹੋਈ ਹੈ ਨਹਿਚਲ ਸੱਚ ਨੇਚਲ ਕੀਆ ਢੋਲ ਕੀਆ ਸੱਚ ਉਹ ਕੀਆ ਖੁਦਾਏ ਉਹ ਕੀ ਹੈ ਇੱਕ ਹੈ ਜੀ ਨੂੰ ਅਡੋਲ ਹੈ ਖੁਦਾ ਦਾ ਬੰਦਾ ਦਾ ਬੰਦਾ ਖੁਦਾਈ ਬੰਦਾ ਉਹ ਅਬਨਾਸ਼ੀ ਕਿਉਂ ਖੁਦਾ ਹੈ ਅਡੋਲ ਬੰਦਾ ਵੀ ਅਬਨਾਸ਼ੀ ਜਿਹੜਾ ਏਕ ਖੁਦਾਏ ਨਾਲ ਜੁੜਿਆ ਹੋਇਆ ਹੈ ਉਹ ਅਬਨਾਸ਼ੀ ਹੈ ਹਾਂਜੀ ਉਹ ਅਬਨਾਸ਼ੀ ਏਕ ਦੋ ਹੀ ਪਾਸੇ ਲੱਗੂਗਾ ਨਾ ਨਿਚਲ ਸੱਚ ਖੁਦਾਏ ਏਕ ਦੇ ਦੀਪਕ ਠੀਕ ਹੈ ਜੀ ਇੱਥੇ 17ਵੀਂ ਪੌੜੀ ਸਮਾਪਤੀ ਹੈ ਜੀ